ਜੇ ਲੋਕ ਮਹੱਲਾ रतना ਰਤਨਾ 파ਰਖ ਜੋ ਹੋਵੇ ਸੋ ਰਤਨਾ ਕਰੇ विचार, ਰਤਨਾ ਸਾਰ ਨਾ ਜਾਣੀ ਅਗਿਆਨੀ ਅੰਧ ਅੰਧਾਰ ਰਤਨਾ ਜੇ ਕੋਈ 파ਰਖੂ ਹੋਵੇ ਉਹੀ ਰਤਨਾ ਦੀ ਵਿਚਾਰ ਕਰੇ ਰਤਨਾ ਦਾ ਵਪਾਰ ਕਰੇ ਰਤਨ ਜੀਨਾ ਗੋਲ ਜਿਹੜਾ ਗੋਣਾ ਬਰਬਾਣੀ ਜੇ ਰਤਨ ਦੇ ਵਾਹਰ ਨੂੰ ਇਹਨਾਂ ਰਤਨਾ ਦਾ ਕੋਈ 파ਰਖੂ ਹੋਵੇ ਤਾਂ ਵਿਚਾਰ ਕਰਦੇ ਉਹ ਗੁਰਬਾਣੀ ਦੇ ਵਿੱਚ ਰਤਨ ਜਿਹੜੇ ਹੋਏ ਨੇ ਵਿਚਾਰ ਉਹ ਕਰੇ ਜਿਹਨੂੰ ਰਤਨ ਦੀ ਲੋੜ ਹੋਵੇ ਇਹਨਾਂ ਦੇਰ ਵਾਰ ਹੋਣਾ ਹੋਵੇ ਜਿਹਨੂੰ ਜਿਹਨੂੰ ਇਹਨਾਂ ਲੋੜ ਹੋਵੇ ਰਤਨਾਂ ਦੀ ਉਹ ਵਿਚਾਰ ਕਰੇ ਰਤਨਾ ਕਰੇ ਵਿਚਾਰ ਠੀਕ ਹੈ ਜੀ 파ਰਖੂ ਹੀ ਕਰ ਸਕਦਾ ਰਤਨਾ ਸਾਰਨਾ ਜਾਣੇ ਹੀ ਅਗਿਆਨੀ ਆਂਦੰਦਰ ਜਿਹੜਾ ਰਤਨ ਦੀ ਸਾਲੇ ਨਹੀਂ ਜਾਣਦਾ ਰਤਨ ਬਾਰੇ ਗਿਆਨ ਨਹੀਂ ਜਾਣਦਾ ਉਹ ਤਾਂ ਹੋ ਜਾਂਦੀ ਆਂ ਅੰਧਾ ਹਾਰ ਹੈ ਉਹਨਾਂ ਉਹਨਾਂ ਦਾ ਕਹਿਣਾ ਜਗਦੀਸ਼ ਕੀ ਜਗਤ ਹਵਲੰਦੇ ਜਾਏ ਸਾਰਾ ਜੱਗ ਹੀ ਜਾਂਦਾ ਜਾਂਦਾ ਗੁਰਬਾਣੀ ਦੀ ਕੀਮਤ ਦਾ ਕਿਸ ਨੂੰ ਪਤਾ ਹੀ ਨਹੀਂ ਕਿਸੇ ਨੇ ਗੁਰਬਖਸ਼ ਕੋਈ ਕੀਮਤ ਕੀ ਉਹ ਜਾਗਰੂਕ ਆਕੀ ਦਾ ਜ਼ਬਰ ਨਹੀਂ ਦੇ ਹੋਜੀ ਰਤਨ ਗੁਰੂ ਦਾ ਸ਼ਬਦ ਹੈ ਬੁੱਝੈ ਬੁੱਝਣ ਹਾਰ ਮੂਰਖ ਆਪ ਗਣਾਈਂਦੇ ਸ਼ਬਦ ਗੁਰੂ ਦਾ ਸ਼ਬਦ ਹੈ ਉਹ ਰਤਨ ਗੁਰੂ ਦਾ ਸ਼ਬਦ ਹੈ ਜਿਹੜਾ ਬਿਨਾਂ ਕੰਨਾਂ ਤੇ ਸੁਣਿਆ ਦੇ ਵਿੱਚ ਰਤਨ ਉਹ ਤੋਂ ਲੈ ਕੇ ਰਤਨ ਵੀ ਗੁਰਬਾਣੀ ਜੜ ਦਿੱਤੇ ਜਿੱਥੇ ਜੜੇ ਨੇ ਇਹ ਸਗਲ ਗੁਣ ਗੁਣਾਂ ਦਾ ਹਾਰ ਬਣਾਇਆ ਸਗਲ ਸਾਰੇ ਗੁਣੇ ਜੜ ਕੇ ਹਾਰ ਬਣਾਇਆ ਪਹਿਨਣ ਵਾਸਤੇ ਗੁਰਬਾਣੀ ਧਾਰਨ ਕਰਨ ਵਾਸਤੇ ਨਤਨ ਗੁਰੂ ਦਾ ਸ਼ਬਦ ਹੈ ਕੋਈ 부ਜਣ ਹਾਰ 부ਜੂ ਹੈ ਹੈ ਮੂਰਖ ਆਪ ਗਣਾਈਂਦੇ ਮਰ ਜੰਮੈ ਹੋਏ ਖਵਾਰ ਉਹ ਦਾ ਆਪ ਗੁਰਾਈ ਜਾਂਦੇ ਨੇ ਨੇ ਦਾ ਆਪ ਗਣਾਈ ਨੇ ਪਰ ਜਦ ਵੀ ਬਾਰੋ ਬਾਰ ਜਮਨ ਮਲ ਤੇ ਪਏ ਰਹਿ ਕੇ ਉਹ ਪਰਬ ਕਿਆਨੀ ਦੇ ਉਹਨਾਂ ਨੂੰ ਸਮਝ ਦੀ ਗੁਰਬਾਣੀ ਦੀ ਠੀਕ ਹੈ ਜੀ ਉਹ ਮਰ ਜੰਮਣ ਦੀ ਖਵਾਰੀ ਤੇ ਪਏ ਰਹਿਣਗੇ ਹਾਂ ਨਾਨਕ ਰਤਨਾ ਸੋਲ ਹੈ ਜਿਵੇਂ ਗੁਰਮੁਖੀ ਲੱਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਬਿਵਹਾਰ ਆਹਨ ਰਤਨ ਹੈ ਰਤਨ ਨੂੰ ਤਾਂ ਉਹ ਪ੍ਰਾਪਤ ਕਰਦਾ ਜਿਸ ਗੁਰਮੁਖੀ ਲੱਗਦਾ ਜਿਹਨੂੰ ਪਿਆਰ ਲੱਗ ਜਾਂਦਾ ਹੈ ਨਾ ਰਤਨਾਂ ਦੇ ਨਾਲ ਦੇਖੋ ਗੁਰਮਖਾ ਦਾ ਪਿਆਰ ਵੀ ਵੱਖਰਾ ਗੁਰਮਖਾ ਦਾ ਨਾਮ ਵੀ ਵੱਖਰਾ ਗੁਰਮਖਾ ਦੀ ਤਪਸੀ ਵੀ ਵੱਖਰੀ ਗੁਰਮਖਾ ਦਾ ਸਾਰ ਵੀ ਵੱਖਰਾ ਗੁਰਮਖਾ ਦਾ ਸਭ ਕੁਝ ਇਕੱਠਾ ਕੁਰਮਕਾਨੇ ਨਾਲ ਗੁਰਮਖਾਨਾ ਕੁਝ ਹੁੰਦੀ ਰਹਿੰਦਾ ਸਭ ਸਾਰਿਆਂ ਨਾਲ ਗੁਰਮਖਾਨਾ ਕੁਝ ਹੁੰਦੀ ਰਹਿੰਦਾ ਠੀਕ ਹੈ ਕੁਰਮਕਾਨਾ ਪਿਆਰ ਸੱਚਾ ਹੁੰਦਾ ਹੈ ਕੁਰਮਕਾਨਾ ਪਿਆਰ ਮਤਲਬ ਦਾ ਹੁੰਦਾ ਸਦਾ ਸਦਾ ਨਾਮ ਉਚਰਨ ਮਾਣੂ ਰਿਸ਼ਤ ਜੋ ਹਾਰ ਕਰਦੇ ਨੇ ਸਦਾ ਸਦਾ ਨਾਮ ਦਾ ਉਚਾਰਨ ਕਰਦੇ ਗੁਰਬਾਣੀ ਦਾ ਉਚਾਰਨ ਵੀ ਕਰਦੇ ਨੇ ਚੋਬੀ ਵਕਤੇ ਉਹਨਾਂ ਨੂੰ ਕੋਈ ਚੰਗ ਨਹੀਂ ਲੱਗਦਾ ਇਹ ਕੋਈ ਹੋਰ ਗੱਲ ਨਹੀਂ ਪਾਈ ਗੁਰਪ੍ਰਸਾ ਇਹ ਗੱਲ ਕਰ ਸਾਡੇ ਕੋਲ ਸਾਨੂੰ ਨਹੀਂ ਜੁਤੀ ਲੱਗਦੀ ਕੋਈ ਹੋਰ ਗੱਲ ਇਹ ਉੱਠ ਕੇ ਚਲਾ ਜਾ ਉਹ ਜਿਹੜਾ ਨਾਮੋ ਰਿਕ ਤੋਹਾਰ ਦਾ ਹੀ ਵਿਹਾਰ ਹੈ ਹਲੂਕ ਲੈਣਾ ਇਹ ਹਲੂਕ ਦੇਣਾ ਗੁਰੂ ਦਾ ਗਿਆਨ ਲੈਣਾ ਇਹ ਗੁਰੂ ਦਾ ਗਿਆਨ ਦੇਣਾ ਇਹੋ ਆ ਦਾ ਵਿਹਾਰ ਇਹ ਜੀ ਭਗਤ ਜਨਾ ਕੀ ਵਰਤਨ ਨਾਮ ਹੈ ਜੀ ਹਾਂ ਜੀ ਠੀਕ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾਂ ਉਰਤਾਰ ਐਸੀ ਕਿਰਪਾ ਜੇ ਮੇਰੇ ਤੇ ਹੋ ਜਾਏ ਨਾਮ ਨੂੰ ਮੇਰੇ ਕਰਕੇ ਰੱਖਾਂ ਐਂ ਤੇਰੇ ਵੀ ਮੇਰਾ ਰੱਖਿਆ ਹੋਇਆ ਉਹ ਹੋ ਜੇ ਹੋਵੇ ਤਾਂ ਮੈਂ ਵੀ ਕਿਸੇ ਅਵਸਥਾ ਜਿਹੜਾ ਹਾਂ ਹਰ ਵਕਤ ਉਹਦਾ ਨਾਮ ਜਪਣ ਕਰਕੇ ਰੱਖਣ ਲੱਗੇ। ਤੇ ਕਿਰਪਾ ਹੋ। ਤੇ ਜੇ ਕਿਰਪਾ ਹੋ ਜਾਏ ਉਹਦਾ ਹੀ ਉਹਦੀ ਉਹ ਅਵਸਥਾ ਹੋ ਜਾ। ਠੀਕ ਹੈ ਜੀ। ਮਹੱਲਾ ਤੀਜਾ ਸਤਿਗੁਰ ਕੀ ਨਾਮ ਨਾਲ ਲੱਗੋ ਪਿਆਰ ਮਤ ਤੂੰ ਜਾਣੋ ਜੀਵ ਦੇ ਕੋਇ ਆਪ ਮਾਰੇ ਕਰਤਾਰ ਜਿਹੜੇ ਸਤਿਗੁਰ ਦੀ ਸੇਵਾ ਅੱਜ ਕੋਲ ਦੇ ਭਾਂਵੇਂ ਵੀ ਚੱਲਿਆ ਜਿਹੜਾ ਆ ਨਾਮ ਪਿਆਰ ਹਰ ਨਾਮ ਨਾਲ ਤੇ ਅਦੀ ਲੱਗਿਆ ਆਸਤੋ ਮਜਾਣਾ ਨੂੰ ਆਸਤੋ ਮਜਾਣਾ ਹੋਏ ਜੀਵਨ ਦੇ ਆਪ ਮਾਰੇ ਕਰਤਾਰ ਹੋ ਤਾਂ ਕਰਤਾਰ ਨੇ ਮਾਰੇ ਹੋਏ ਨੇ ਉਹ ਤਾਂ ਮਾਰੇ ਮਾਰੇ ਹੋਏ ਨੇ ਅਸੀਂ ਸਾਹਿਬ ਦਾ ਠੀਕ ਹੈ ਜੀ ਉਮੈ ਵੱਡਾ ਰੋਗ ਹੈ ਭਾਏ ਦੂਜੇ ਕਰਮ ਕਮਾਏ ਨਾਨਕ ਮਨਮੁਖ ਜੀਵਨਿਆ ਮੂਏ ਹਰ ਵਿਸਰਿਆ ਦੁਖ ਪਾਏ ਉਮੈ ਵੱਡਾ ਰੋਗ ਹੈ ਸਭ ਤੋਂ ਵੱਡਾ ਰੋਗ ਤਾਂ ਇਹ ਹੋਵੇਗਾ ਉਹ ਦੂਜੇ ਪਾਇ ਮਾਇਆ ਦਾ ਪਿਆਰ ਹੈ ਉਹਨਾਂ ਨੂੰ ਦੂਜੀ ਭੁੱਖ ਲੱਗੀ ਹੈ ਮਾਇਆ ਦੀ ਉਹਦਾ ਮਾਇਆ ਨਾਲੇ ਪਿਆਰ ਐ ਐਂਛਾ ਹੀ ਦੂਜੇ ਕਰਮ ਕਰਮ ਘਮਾਏ ਜਾਨ ਤੋ ਬਨਮੁਖ ਜੀਵ ਤੇ ਬੋਏ ਇਸ ਕਰਕੇ ਜਿਹੜੇ ਮਨ ਬਣ ਨਾ ਸੈਨ ਮਰੇ ਹੋਏ ਨੇ ਸੁੱਖੋਣਾ ਨੂੰ ਵਿਛੜਿਆ ਹੋਇਆ ਆਪਣਾ ਆਪਾ ਵਿਛੜਿਆ ਹੋਇਆ ਆਪਣਾ ਮੂਲ ਵਿਛੜਿਆ ਹੋਇਆ ਕਰਕੇ ਦੁੱਖ ਪਾਉਂਦੇ ਨੇ ਹਾਂਜੀ ਪੌੜੀ ਜਿਸ ਅੰਤਰ ਹਿਰਦਾ ਸ਼ੁੱਧ ਹੈ ਇਸ ਜਨ ਕੋ ਸਭ ਨਮਸਕਾਰੀ ਜਿਸ ਅੰਤਰ ਨਾਮ ਨਿਧਾਨ ਹੈ ਇਸ ਜਨ ਕੋ ਹੌ ਬਲਹਾਰੀ ਅੰਤਰ ਹਿਰਦਾ ਸੁੱਧ ਹੈ ਜਿਹਦਾ ਅੰਦਰੋਂ ਹਿਰਦਾ ਸੁੱਧਾ ਉਹ ਜਨ ਨੂੰ ਤਾਂ ਸਾਰੇ ਨਮਸਕਾਰ ਕਰਦੇ ਨੇ ਨਮਸਕਾਰ ਕੀਤੀ ਹੈ ਭਗਵਾਨ ਪਹਿਲਾਂ ਤਾਂ ਹਿਰਦਾ ਸੁੱਧਾ ਸਿਰਫ ਬਾਹਰ ਖਾਲੀ ਹੈ ਇਹ ਬਾਹਰ ਨਾਲੀ ਹੈ ਹਿਰਦਾ ਸੁੱਧੇ ਹੈ ਥਾਂਵੇਂ ਨਮਸਕਾਰੀ ਨਾ ਕੋ ਪਰ ਜੇ ਅੰਦਰ ਨਾਮ ਦਾ ਆਣਾ ਗਿਆ ਜਨ ਕੋ ਬਲੇ ਹਰੀ ਉਹ ਜਨ ਜਿਹਨੂੰ ਬਲਿਆ ਰਹਨਾ ਕੁਰਬਾਨ ਹੋਵੇ ਇਹਨੇ ਪਾਣਾ ਪਾਣੇ ਆ ਲਿਆ ਨਾਲ ਦੁੱਧ ਕਰਕੇ ਪਾਣਾ ਥਾਲੀ ਕਰਕੇ ਪੜ ਲਿਆ ਤੇ ਜਦ ਕੋ ਬਲਿਆ ਹਰੀ ਉਸ ਤੇ ਦੇਣੀ ਇਹਨਾ ਦੁੱਧ ਨਾਲ ਪੜ ਲਿਆ ਉਹ ਨੂੰ ਬਲੇ ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਸੋ ਸਤਗੁਰ ਸਬਨਾ ਮਿੱਤ ਹੈ ਸਭ ਤਿਸੈ ਪਿਆਰੀ ਦੁੱਧ ਰੜਕ ਲਿਆ ਦੁੱਧ ਪਾਨਿਆ ਪਹਿਲਾਂ ਜਿਹਨੇ ਬਲੋਗ ਲਿਆ ਹਰਕਾ ਬਲੋਗਾਂ ਬਲੋਗੋ ਮੇਰੇ ਭਾਈ ਅੱਗੇ ਬਲੋਗੋ ਜੈਸੇ ਤੱਕ ਨੁਝਾਈ ਇਹਨੇ ਕੇ ਮੱਖਣਾ ਖਾ ਲਿਆ ਅੰਤਰ ਬੁੱਧ ਬਵੇ ਕਾ ਉਰੀ ਬੁੱਧ ਬਵੇ ਹੋ ਠੀਕ ਹੈ ਸਤੋ ਬਾਤ ਹੈ ਔਰ ਬਾਣੀ ਰੜਕ ਕੇ ਉਹਦਾ ਤੱਕਸਾਲ ਲੈ ਲਿਆ ਬਵੇਗ ਬੁੱਧੀ ਹੋ ਗਈ ਤੀਜੀ ਸਟੇਜ ਹੋਈ ਹੈ ਹਰ ਨਾਮ ਮੁਰਾਰੀ ਹਰ ਨਾਮ ਮੁਰਾਰੀ ਉਹਦੇ ਅੰਦਰ ਨਾਮ ਮੁਰਾਰੀ ਪ੍ਰਗਟ ਹੈ ਸਤਗੁਰ ਸੋਸਨਾ ਦਾ ਬ੍ਰਤ ਹੈ ਸਭ ਤੇ ਪਿਆਰੀ ਉਹ ਹੈ ਸਤਗੁਰ ਉਹ ਸਤਗੁਰ ਦੀ ਰਸਤਾਂ ਨੂੰ ਪ੍ਰਾਪਤਾ ਕੀ ਤੀਜੀ ਸਟੇਜ ਆਲਾ ਆ ਜਿਹੜਾ ਤੀਜੀ ਸਟੇਜ ਆਲਾ ਬਵੇਕ ਬੁੱਧ ਆਲਾ ਇਹਨੂੰ ਹੀ ਕਹਿੰਦੇ ਨੇ ਠੀਕ ਹੈ ਜੀ ਫਿਰ ਉਹ ਤੋਂ ਕੀਤਾ ਫਿਰ ਆਪ ਆਪਣੇ ਗੁਰਬਾਣੀ ਦਾ ਗਿਆਨ ਭਰਿਆ ਫਿਰ ਉਹ ਉੱੜ ਕੇ ਫਿਰ ਉਹ ਤਾਂ ਸਤ ਪ੍ਰਾਪਤੀ ਦਾ ਸਤ ਗਿਆਨ ਸੁਵੇਕ ਬੜੀ ਤੇਜਾ ਕੇ ਸਤਗੁਰ ਦੀ ਉਹ ਸਭਨਾ ਦਾ ਬਿਤਾ। ਹੈ। ਸਭਨਾ ਦਾ ਬਿਤਾ। ਸਭਨਾ ਦਾ ਬਿਤਾ ਸਭ ਤਿਸੇ ਪਿਆਰੀ। ਉਹਨ ਸਾਰਿਆਂ ਪਿਆਰ ਹੈ। ਨਾ ਕੋਈ ਬੈਰੀ ਨਾ ਹੀ ਅਵਸਥਾ ਵਿੱਚ ਰਹਿ ਜਾਂਦਾ ਫਿਰ ਉਹ। ਉਹ ਫਿਰ ਧਰਮ ਨਹੀਂ ਰਹਿਦਾ ਸਭ ਸਾਰੀ ਧਰਮਾਂ ਦਾ ਕੋਈ ਨਹੀਂ ਰਹਿਦਾ ਸਾੱਚੀ ਧਰਮ ਰਹਿਣਾ ਠੀਕ ਹੈ ਜੀ ਤਬ ਆਤਮ ਰਾਮ ਪਸਾਰਿਆ ਗੁਰਬੁੱਧ ਵਿਚਾਰੀ ਸਾਰੀ ਆਤਮਾ ਰਾਮ ਪਸਾਰਿਆ ਸਾਰਿਆਂ ਦੀ ਹੀ ਹੈ ਗੁਰਬੁੱਧ ਵਿਚਾਰੀ ਬੁੱਧੀ ਨੇ ਵਿਚਾਰ ਕੇ ਦੱਸਿਆ ਉਹ ਪਾਈ ਸਾਰਿਆਂ ਦੇ ਵਿੱਚ ਇੱਕੋ ਜੋਤ ਹੈ ਆਤਮਾ ਰਾਮ ਸਾਰਿਆਂ ਚਾ ਕੋਈ ਬਾਹਰੀ ਦੋਇ ਬਗਦ ਸਾਰੇ ਆਪਣੇ ਹੀ ਦੇ ਪਰਾਂ ਕੋਈ ਵਲੀ ਹੈ ਇਹ ਵਿਚਾਰ ਕੇ ਦੱਸਿਆ ਫਿਰ ਉਹਨੇ ਦੱਸਿਆ ਇਹ ਗੱਲ ਠੀਕ ਹੈ ਜਿਹੜੀ ਗੁਰ ਤੋਂ ਬੁੱਧੀ ਪ੍ਰਾਪਤ ਹੋਈ ਸੀ ਉਹਦੀ ਵਿਚਾਰ ਨਾਲ ਇਹ ਜਾਣਿਆ ਗਿਆ ਕੌਣ ਹੈ ਜੀ ਆਤਮਾ ਹੀ ਸਾਰਿਆਂ ਸਮਨ ਜੋ ਜੋ ਰਾਮ ਵੀ ਉਹਦਾ ਹੀ ਨਾਮ ਹੈ ਫਿਰ ਜੋ ਜਿਹੜੀ ਰਾਮ ਹੈ ਠੀਕ ਹੈ ਕਿਉਂਕਿ ਇੱਥੇ ਗੱਲ ਸਾਫ਼ ਕਰਤੀ ਨਾ ਕਿ ਸਭ ਆਤਮਰਾਮ ਬਸਾਰੇ ਆ ਜਿਹਨੂੰ ਅਸੀਂ ਰਾਮ ਕਹਿੰਦੇ ਹਾਂ ਅਸਲ ਤੇ ਆਤਮਰਾਮ ਹੈ ਜੀ ਆ ਉਹਦਾ ਫਸਾਰਾ ਆਇਆ ਹੋਇਆ ਹੈ ਫਸਾਰੇ ਦੇ ਵਰਕਾ ਜਿਹੜਾ ਫਸਰਿਆ ਉਹ ਤੋਂ ਜੋਤ ਜਿਹੜੀ ਬਾਹਰ ਨਿਕਲੀ ਆ ਮਾਨ ਰੂਪ ਉਹਦੇ ਕਾ ਫਰਕ ਆ ਕੀ ਫਰਕ ਹੈ ਅੱਛਾ ਜੀ ਠੀਕ ਹੈ ਜੀ ਇੱਥੇ ਨੌਵੀਂ ਪੌੜੀ ਸਮਾਪਤੀ ਹੈ ਜੀ